ਸੰਤਰਾ ਤੁਸੀਂ یوں ਬਿਲ ਲਾਏ ਸੰਤ ਦਾ ਦੋਖੀ یوں ਬਿਲ ਲਾਏ ਜੂ ਜਲ ਵੀ ਹੁਣ ਮਛਲੀ ਨੇ ਜਿਹੜੇ ਨੇ ਨਾ ਹੁਣ ਲੱਗੀ ਹੋਈ ਸੱਚ ਬਾਹਰ ਆਏ ਤੇ ਇਹ ਤਾਂ ਆਪ ਹੀ ਦੇਖ ਲੈਣਾ ਇਹ ਤਾਂ ਬਹੁਤੀ ਗੱਲ ਨਹੀਂ ਸੰਤ ਕੇ ਲਈ ਪਰ ਸਤ ਜਿਹਨਾਂ ਨੂੰ ਸੱਚ ਦਾ ਸੁਣ ਕੇ ਤੜਫਣਾ ਲੱਗੀ ਹੋਈ ਹੈ ਨਾ चाहे वो पहला जोड़ देना ही बर्बाद चुके अपने सतानु महापुरका के कुछ काय बैठे जे हम तल्फणा लगी हुई है तो संत के दोखी सी हो क्या है भी संत के दोखी थोड़ी समझ जाण जो जा बचने बच जाण नहीं संत के दोखी चेहरा लगया हुआ है हुआ मोर्चा फिर पता ही जा का दोखी भूखा नहीं राजा ਸੰਤ ਦਾ ਦੁਖੀ ਭੁੱਖਾ ਤੇ ਹੀ ਰਹੇ ਸੰਤ ਦਾ ਦੋ ਫਿਰ ਬੇਸ਼ਕ ਭੁੱਖਾ ਰਹੇਗਾ ਦਾਦਾ ਮਾਇਆ ਲੱਗੀਆਂ ਲੱਗੀ ਰਹਿੰਦੀ ਐ ਜਿਵੇਂ ਅੱਗ ਜਿੰਨਾ ਵਰਜੀ ਇਹਨਾਂ ਬਾਦੋ ਬਸ ਐ ਜੀ ਹੋਦੀ ਹੈ ਜੋ ਪਾਪ ਕੇ ਨਹੀਂ ਤਰਪੇ ਜੋ ਪਾਪ ਕੇ ਇਹਨਾਂ ਨਹੀਂ ਤਰਪਾ ਜਿਵੇਂ ਆਸ ਜਲਦੀ ਹੋਵੇ ਜਿੰਨਾ ਵਰਜੀ ਇਹਨਾਂ ਭਾਈ ਜਾਓ ਉਹ ਕਿਹੜਾ ਵਰਜੀ ਆ ਕੋ ਐਗਾ ਸਵਾ ਸੰਤ ਦਾ ਦੁੱਖੀ ਸੰਤ ਦਾ ਦੁੱਖੀ ਭੁੱਖਾ ਨਹੀਂ ਰਾਜਾ ਦਾ ਮਤਲਬ ਐਸੀ ਉਹ ਜਿਹੜੇ ਡੁਪਲੀਕੇਟ ਖੱਬਤ ਬਣਦੇ ਮਾਇਆ ਖਾਤਰ ਬਣਦੇ ਜਿਹੜੀ ਚੜੀ ਚੜਾ ਪਏ ਖੱਤਰ ਇਹ ਜਨਾਹ ਚੀਜ਼ ਨਾਲ ਲੱਗਣਾ ਨਹੀਂ ਜਾ ਸਕਦਾ ਉਹ ਲੈ ਲਈ ਤੁਸੀਂ ਬਾਹਾਂ ਲੈ ਲਈ ਨਾਮ ਛੱਡ ਦੋ ਪਰ ਸੀ ਜਨਰਲ ਮੀਂਹ ਵੀ ਪਰ ਸੀ ਚੰਦ ਵੀ ਮੇਰਾ ਨਹੀਂ ਉਹ ਸਭ ਤਕਾ ਤੋ ਕੀ ਦਾ ਭੁੱਖਾ ਰਹਿ ਜਾਏਗੀ ਹੁਤਾ ਜੇ ਰਾਜਦਾਨੀ ਦੇ ਉਹਨਾਂ ਦਾ ਜਲ ਪੀਣਾਂ ਦਾ ਰਹੂਗਾ ਮਾਇਆ ਦਾ ਇੱਥੇ ਰਹਿ ਜਣੀ ਫਿਰ ਕਿਸੇ ਹੋਰ ਦੀ ਜਨਮ ਤੈਨੂੰ ਲੈਣਾ ਪੈਣਾ ਇਹ ਟੋਟਲੀ ਗੱਲ ਨਹੀਂ ਸਮਝਾਈ ਹੋਈ ਆ ਕੱਤੀ ਉਹਨਾਂ ਨੂੰ ਸਮਝਾਈ ਹੋਈ ਆ ਥੋੜਾ ਪਹਿਲਾਂ ਖੜੇ ਨੇ ਉਨਾਂ ਦੇ ਚਾਰ ਘੜਬਣਾ ਕੇ ਗੱਲ ਕਰੀ ਹੋਈ ਹੈ ਕਿ ਉੱਤੇ ਕੌਣ ਹੈ ਸੰਤ ਕਾ ਦੋਖੀ ਸਵਾਲ ਇਹ ਵੀ ਕੌਣ ਹੈ ਸੰਤ ਕਾ ਦੋਖੀ ਅੱਜ ਪੰਜ ਵਾਰ ਕਿਹਦੀ ਗੱਲ ਕਰ ਰਹੇ ਹੋ ਕਿਹਦੀ ਗੱਲ ਕਰ ਰਹੇ ਹੋ ਘਰੇ ਜਾ ਸਾਡੇ ਦੋ ਅਸਰ ਸੰਤ ਕਾ ਦੋਖੀ ਹੋਵੇ ਸੰਤ ਕੀ ਕਰਨਾ ਚਾਹੁੰਦਾ ਸਰੋਵਰ ਬਣ ਗਿਆ ਸਰੋਵਰ ਬਣ ਗਿਆ ਪ੍ਰਚਾਰ ਕਰੀਏ ਉਹ ਵਿਗਨ ਬੋਲਦੇ ਨੇ ਰਾਹ ਦੇ ਵਿੱਚ ਜੋਹਾਂ ਪ੍ਰਚਾਰ ਹੋ ਰਿਹਾ ਡੀਣਾ ਤੇ तो ਦੇ ਦੋਖੀ ਤੇ ਹੋਰ ਕੀ ਦੇ ਆਖਰ ਗੱਲ ਕਿਉਂ ਕਹੀ ਜਾ ਸਾਰੀ ਸਾਡੇ ਵਾਸਤੇ ਸੁਗੜੀ ਬਾਣੀ ਲਈ है, ਇਹ ਸੁਗੋਣੀ ਬਾਣੀ ਉਹਨਾਂ ਨੇ ਜ਼ਬੂਦ ਸਾਡੇ ਵਾਸਤੇ ਵੀ ਜਦੋਂ ਸੁਗੜੀ ਹੈ ਉਹਨਾਂ ਨੇ ਦਿੱਤਾ ਵੀ है ਬਾਨ ਹੁਰਦੀ ਸ਼ਾਂਤ ਦਾ ਸੁਗੜਾ ਪਾਣੀ ਲੈ ਕੇ ਸਾਬਤ ਕੀਤਾ ਮੈਨੂੰ ਸੁਖ ਸ਼ਾਂਤੀ ਮਿਲਦੋ ਹੈ। ਔਰ ਜਿਹੜੇ ਮੇਰੇ ਵਿਰੋਧੀ ਇਹਨਾਂ ਦੇ ਅੰਦਰ ਸੁਖ ਸ਼ਾਂਤੀ ਨਹੀਂ ਹੈ। ਇਹ ਮੈਨੂੰ ਆਪਣੇ ਵਰਗਾ ਸਮਝੀ ਤੂੰ। ਆ ਕਰ। ਤਾਂ ਮੈਨੂੰ ਆਪਣੇ ਵਰਗਾ ਜabb ਅਸੀਂ ਵੀ ਮਾਇਆ ਕਰਦੇ ਹਾਂ ਵੀ ਕਰਦਾ ਅਸੀਂ ਨਹੀਂ ਆ ਕਰਦੇ ਹਾਂ ਉਹ ਕਰਦੇ ਐਂ ਕਰਦੇ ਤੇ। ਚੜੀ ਗੱਲ ਤਾਂ ਨਾਲ ਕੋਈ ਕਰਦੇ। ਲੋਕਾਂ ਨੂੰ ਇਹਦਾ ਸਮਝ ਆਉਂਦੀ ਹੈ। ਅਦਬ ਜਿਆਦਾ ਹੋ ਗੱਲ ਲੰਤੇ ਤੇ ਲੋਕਾਂ ਨੂੰ ਅਦਬ ਜਿਆਦਾ ਵਾਲੀ ਗੱਲ ਜ਼ਿਆਦਾ ਵਧੀਆ ਲੱਗਦੀ ਹੈ ਕੋਹਾਂ ਦੀ ಬುਤੀ ਹੋਣੀ ਹੁੰਦੀ ਹੈ ਉਹ ਹਮਲਾਦਾਂ ਦੇ ਕਹਾਸਾਂ ਉਹ ਵਧੀਆ ਵਧੀਆ ਗੱਡੀਆਂ ਉਹਨਾਂ ਦੇ ਹਿਸਾਬ ਨਾਲ ਵਧੀਆ ਹੀ ਆ ਉਹਨਾਂ ਦੇ ਨੌਲੇਜ ਦੇ ਹਿਸਾਬ ਨਾਲ ਠੀਕ ਆ ਸਾਡੇ ਵਾਲੀ ਗੱਲ ਤਾਂ ਉਹਨੇ ਸੁਝ ਨਹੀਂ ਹੁੰਦੀ ਉਹ ਤਾਂ ਕਥਾਵਾਚਕ ਦੇ ਸਮਝ ਆਉਂਦੀ ਹੈ ਤਾਂ ਜਿਹੜਾ ਤਕੜਾ ਸੰਤ ਦਾ ਦੋਖੀ ਭੁੱਖਾ ਨਹੀਂ ਰਾਜਾ ਸੰਤ ਜਿਉਂ ਪਾਪ ਕਹਿੰਦੇ ਨਹੀਂ ਧਰਪ ਸੰਤ ਦਾ ਦੋਖੀ ਛੁੱਟੇ ਅਕੇਲਾ ਗੁਆੜ ਤਿਲ ਮੈਂ ਤਿਲ ਫੇਟ ਮੈਂ ਦੋਹਿਲਾ ਉਹ ਉਹ ਤੇ ਛੋਟੇ ਤੇਲ ਬਾੜ ਜਿਉਂ ਸਧਿਆ ਤਰਖੇ ਤਾਂ ਨਾ ਵਰਨਾਮਤ ਨੇ ਕਿਹਾ ਵੀ ਜਿਹੜੇ ਬਾੜ ਤੇਲ ਹੁੰਦੇ ਨੇ ਜਿਹੜੇ ਤੇਲ ਹੁੰਦੇ ਨੇ ਤੇਲ ਹੁੰਦੇ ਨੇ ਜੰਗਲੀ ਤੇਲ ਕਹਿੰਦੇ ਨੇ ਉਹ ਜਿਹੜੇ ਕਾਲੇ ਕਾਲੇ ਦੇ ਤੇਲ ਸਵਾਹੀ ਹੁੰਦੀ ਹੈ ਹੁੰਦੇ ਤੇਲ ਵਾਲੇ ਤੇਲ ਨਹੀਂ ਹੁੰਦੇ ਆਪਣੇ ਤੇਲ ਕਾਲੇ ਵੀ ਉੱਧਰ ਤੇਲ ਹੁੰਦਾ ਉਹਨਾਂ ਦੇ ਵਿੱਚ ਤੇਲ ਨਹੀਂ ਹੁੰਦਾ ਦਿਲਾਂ ਦੇ ਸਵਾਹ ਹੁੰਦੀ ਹੈ ਉਹ ਬਾੜ ਤੇ ਕਹਿੰਦੇ ਨੇ ਜੰਗਲੀ ਤੇਲ ਹੋ ਜਾਂਦਾ ਤੇ ਵੱਧਦੇ ਨਹੀਂ ਆਪਾਂ ਕੋਈ ਚੀਜ਼ ਵੱਧਦੇ ਆ ਤਾਂ ਉਹ ਤੇਜ਼ੀ ਨਾਲ ਵੱਧਦੇ ਹੁੰਦੇ ਤੇ ਚਰੀ ਵੀ ਵਢੀ ਆ ਚਰੀ ਜ ਹੋ ਗਿਆ ਕੋਈ શરીਰੇ ਨਾਲ ਤਲ ਨਹੀਂ ਪੜਦੇ ਸਮਾ ਡੰਡਰ ਨੂੰ ਖੰਦਾਦੀ ਹੈ ਚਰੀ ਵੀ ਛੜ ਦਿੰਦਾ ਵਿੱਚ ਜ ਟੋਕਾ ਕਰਦੀ ਹੈ ਧੰਨਵਾਦ ਵੇਸ ਕਰਕੇ ਉਹਨੂੰ ਛੱਡ ਦਿੰਦੇ ਉਹ ਆੜ ਖੇਤ ਮੈਂ ਜੋ ਜੰਗਰ ਆਉਂਦਾ ਜੇ ਉਹਨੂੰ ਹੰਦਾ ਕੋਈ ਨਹੀਂ ਮਤਬ ਉਹ ਤਾਂ ਜੰਗਰ ਦਾ ਥੱਲੇ ਗਿਆ ਡਾਡਾ ਹੋ ਗਿਆ ਯਾਨੀ ਉਹਦੀ ਬੇਕਸਰੀ ਬੇਦਰਦੀ ਹੁੰਦੀ ਹੈ ਵੀ ਮਹਿਸੂਸ ਕਰਦਾ ਜੀਵ ਨਹੀਂ ਲੱਗਦਾ ਅੱਖਰ ਤੱਕ ਕੋਈ ਪੌਦਾ ਹੈ ਹੈ ਉਹ ਕਹਾਂਗੇ ਆਇਆ ਇਕੱਲਾ ਰਹਿ ਜਾਂਦਾ ਇਕੱਲਾ ਰਹਿ ਜਾਂਦਾ ਜੋ ਗਵਾਰਡ ਤਲ ਖੇਤ ਜੋ ਗਵਾਰਡ ਤਿਲ ਖੇਤ ਚੱਲ ਨੱਠ ਪਈ ਇਹੋ ਜੀ ਹਾਲਤ ਹੋ ਗਈ ਸੀ ਉਹਦੀ ਚੱਦੂ ਦੀ ਚੱਦੂ ਦੀ ਹਾਲਤ ਹੋ ਗਈ ਨਹੀਂ ਨੱਠ ਪਈ ਤੇ ਇਹ ਜੀ ਸਾਰੇ ਹੀ ਸਾਥ ਛੱਡ ਗਏ ਸਰਕਾਰ ਵੀ ਛੱਡ ਗਈ ਚੱਦੂ ਦੀ ਨਾ ਚੱਦੂ ਦੀ ਇਹ ਹਾਲਤ ਹੋਈ ਹੈ widehat pali gadi gadi pherya usay lahore di jithe unki hukumat si. Jithe aaj kal da utthe gadi gadi pherya usay gadi gadi pherya. Ta yaar anke akhela ਸੰਤ ਦਾ ਦੋਖੀ ਧਰਮ ਤੇ ਰਹਤ ਸੰਤ ਦਾ ਦੋਖੀ ਸਤ ਮਿਥਿਆ ਕਹਿਤ ਸੰਤ ਦਾ ਦੋਖੀ ਧਰਮ ਤੇ ਰਹਤ ਸਤ ਦਾ ਦੋਖੀ ਸਤ ਮਿਥਿਆ ਕਹਿਤ ਸਦਾ ਹੀ ਝੂਠ ਬੋਲਦਾ ਤੰਦਰ ਪਰਮਤਰਾ ਦਾ ਧਰਮ ਨਹੀਂ ਰੱਖਦਾ ਉਹ ਬਿਲਕੁਲ ਧਰਮ ਨਾਲ ਜਿਹੜੇ ਮਿਥਿਆ ਕਹਿ ਰਹੇ ਨੇ ਸੰਤ ਕਹਿੰਦਾ ਮਿਥਿਆ ਕਹਿਲ जिन्होंने धर्म ਦਾ ਪ੍ਰਚਾਰ ਕੀਤਾ ਸੱਚ ਦਾ ਉਹਨਾਂ ਤੇ ਹੋਇਆ ਦੀ ਵਿਥਾ ਕਹੀਆਂ ਨੇ ਵਿਥਾ ਬੋਲੀਆਂ ਨੇ ਅੱਜ ਤੱਕ ਕਿਹੜੇ ਸੰਤਾਂ ਨੇ ਇੱਕ ਤਾਂ ਧਰਮ ਤੇ ਰਹੇ ਤੇ ਸ਼ੀ ਕਉ ਵਿਧਿਆ ਕਹਿਣ ਵਾਲਾ ਧਰਮ ਤੋਂ ਰਹ ਦੂ ਧਰਮ ਤੋਂ है ਵਿਥਿਆ ਕਹਿਣ ਤੌ ਤਰ ਮੁਦੇ ਰਹੇ ਤਾਂ ਜੇ ਸਾਥੋ ਕੋਲ ਹੈ ਫਿਰ ਤਰ ਮੈਂ ਸਾਥੇ ਤਰ ਮੈਂ ਸਾਜ ਮਿਥਿਆ ਤਹਿਤ ਜਿਹੜਾ ਝੂਠ ਬੋਲੇ ਸੰਤਾਂ ਨੇ ਝੂਠੀਆਂ ਸਾਖੀਆਂ ਸੁਣਾਈਆਂ ਨੇ ਝੂਠੇ ਅਰਥ ਦਿੱਤੇ ਨੇ ਇਹ ਫਿਰ ਸੰਤ ਕੇ ਦੁਖੀ ਸਾਫਤ ਹੋ ਗਏ ਸੰਤ ਨਹੀਂ ਸੰਤ ਕੇ ਦੁਖੀ ਨੇ ਜੇ ਸੱਚ ਬੋਤ ਨੇ ਫਿਰ ਦਰਤ ਬਿਲਕੁਲ ਤੰਦਰ ਪਾਣੀ ਬਰਾਬਰ ਹੋ ਜਾਣੇ ਨੇ ਕਿਸੇ ਵੀ ਕੋਟ ਚ ਕਿਸੇ ਵੀ भी ਦੇ ਵਿੱਚ 10 ਆਦਮੀ ਇਕੱਠੇ ਚ ਇਹ ਕਹਿ ਨਹੀਂ ਸਕਦੇ ਵੀ ਅਸੀਂ ਸੰਤ ਲੋਕੀ ਵੀ ਇਧਾਂ ਸਾਫ਼ ਹੋ ਜਾਣ ਉਹਨਾਂ ਦੇ ਕੰਮ ਨਹੀਂ ਸਾਫ਼ ਕਰ ਇਹਨਾਂ ਨੂੰ ਸਾਫ਼ ਕਰ ਦਗਾ ਵੀ ਇਹ ਗੁਰ ਬਾਣੀ ਦੇ ਹਿਸਾਬ ਨਾਲ ਤੁਸੀਂ ਦੱਸੋ ਸੰਤ ਕਹਿਆ ਲਾ ਨਹੀਂ ਛੋਟਿਆ ਜੋ ਤੁਮ ਨੂੰ ਉਹੀ ਦੱਸਿਆ ਵੀ ਤੇਜ ਬਣੇ ਹੋਏ ਨਾ ਤੁਹਾਡੇ ਤੇ ਇਹਦਾ ਜਵਾਬ ਦੇਣਾ ਪੈਣਾ ਨਾ ਸੰਤ ਦੇ ਵਿੱਚ ਆਪਣਾ ਜਵਾਬ ਦੇਰ ਦਰਨੇ ਨੂੰ ਦੱਸਦਾ ਗੁਰ ਬਾਣੀ ਦੀਆਂ ਦਫਾ ਲੱਗੀਆਂ ਭਈਆਂ ਨਾ ਕਿ ਇਤਿਹਾਸ ਨੇ ਸਾਰੇ ਹੋਏ ਹੋਏ ਤੁਸੀਂ ਆਪਣੇ ਬਚਾਅ ਵਾਸਤੇ ਕੀ ਕਹਿਣਾ ਚਾਹੁੰਦੇ ਹੋ ਤਿਆਰ ਹੋ ਗਏ ਗੁਰ ਜੋ ਕਹਿੰਦੀ ਹੈ ਉਹਦੇ ਇਲਾਵਾ ਤੁਸੀਂ ਆ ਕੋਈ ਹੋ ਪਿਆਰ ਹੋ ਉਹ ਹੋ ਜੋ ਤੁਸੀਂ ਅੱਜ ਤੇ ਕੀਤਾ ਜੇ ਨਹੀਂ ਸੀ ਪਤਾ ਸਮਝ ਨਾ ਭੇਜਦੇ ਤੇ ਅੱਜ ਪਤਾ ਲੱਗਦਾ ਧਰਮ ਨੇ ਨਾ ਆਜੇ ਹਰਦੂ ਭਾਈ ਛੱਡਾਂ ਤੋ ਦੂਬ ਰਿਗੇ ਜੰਦੂ ਆਪ ਤੁਹਾਨੂੰ ਵੀ ਦੇਣਾ ਪਊਗਾ ਮਾਫੀ ਕਰਨਾ ਕਿਸੇ ਨੇ ਨਹੀਂ ਮਾਫ ਕਰਦਾਂਗੇ ਇਹਦੇ ਬਲੇ ਕੇ ਹੀ ਰਹਿਣਾ ਮਾਫੀ ਹੋਰ ਦਿੰਦੇ ਨੀ ਧਾਰਾ ਲਾਈ ਹੋਈ ਆ ਹੋਰ ਪਾਣੀ ਧਾਰਾ ਪ੍ਰਚਾਰ ਨਾਲ ਖਵਾ ਫੇ ਹੀ ਹੁੰਦਾ ਰਹੂਗਾ ਖੜਾ ਕੇ ਮੁਝਾਉਂਦੇ ਦਾ ਹਰ ਇੱਕ ਪਰਛਾਅ ਆਏਗਾ ਜੰਦਾ ਚੌੜੇ ਉਹ ਝੋੜਦਾ ਮੁਝੇ ਫੇ ਮਾਰ ਕੇ ਤੇ ਭੱਜਣ ਦੇ ਝੜਝੜ ਕੇ ਝੋੜੀ ਖਾ ਲੂ ਮੇਰਾ ਬਦਵਾਤ ਹੈ ਤੇ ਛੜਾਓ ਇਹ ਕਹਿੰਦਾ ਖੜੀ ਗੁਰਬਾਣੀ ਉਹਦੀ ਝੋੜੀ ਨਾ ਤੇ ਭਲੀ ਰਹਿਣ ਦਾ ਸਮਾਰ ਦੁੱਧੇ ਛੱਡਣਾ ਕੋ ਆਪਲੀ ਰਹਿਣ ਤੇ ਜਿਹੜੀ ਹੈ ਸੋਮਰਸਾ ਬਾਣੀ ਇਹ ਗੁਰੂ ਜੀ ਨੇ ਇਹ ਰਲਾ ਪਾਇਆ ਹੋਇਆ ਇਹ ਸੋਸਾਇਟੀਆਂ ਬੜਾਂ ਬੈਠੇ ਗੁਰਦੁਆਰਿਆਂ ਦੇ ਸੋਹੂੜੀ ਸੋਸਾਇਟੀਆਂ ਫਸ ਗਏ ਸਾਰੇ ਭੱਜਣ ਖੇਤ ਨੂੰ ਭਜਦਾ ਜੀ ਹਾਂ ਜੀ ਕਿੱਥੇ ਨੰਦਕਾ ਨੰਦਕਾ ਕਾ ਪਿਆ ਨਾਨਕ ਜੋਤਿਸ ਭਾਵੇ ਸੋਈ ਪਿਆ ਕਿਤ ਨੰਦਕਾ ਤੋਢੀ ਪਿਆ ਜਦ ਤੱਕ ਇਹ ਨਹੀਂ ਕਰ ਤੋ ਹੁੰਦੀ ਐ ਅਸੱਤਿ ਉਹਦੇ ਅੰਦਰੋਂ ਹੀ ਚੱਲਦੀ ਐ ਗੱਲ ਧਰੋਂ ਜੋ ਨੰਦਕ ਅੰਦਰ ਸੋਚਦਾ ਉਹੀ ਕਰਦਾ ਅੰਦਰ ਜਿਵੇਂ ਹਾਲਤਾ ਹੈ ਉਹਦੇ ਦਾ ਜੋ ਲਿਖਿਆ ਹੋਇਆ ਉਹਨੇ ਖਾਂ ਲਿਖੇ ਨੂੰ ਛੱਡ ਕੇ ਬਟੇ ਵੀ ਛੱਡਦਾ ਬਦਲ ਵੀ ਛੱਡਦਾ ਹਾਂਜੀ ਨਾਲੂਕ ਜੋਤੀਸ ਭਾਵੇਂ ਸੋਈ ਥੀਏ ਨਾਲੂਕ ਜੋਤੀਸ ਭਾਵੇਂ ਸੋਈ ਥੀਆ ਇਹ ਡੇਰੇ ਡੂਰੇ ਕਹਿੰਨਾ ਮੈਂ ਆਪੇ ਝੜਦੰਢ ਨਸਤਾ ਨਹੀਂ ਹੱਥ ਹੈ ਉਹਦੀ ਗਲਤੀ ਸਾਨੂੰ ਸਾਨੂੰ ਮਾਫ ਕਰ ਪ੍ਰਚਾਰ ਕਰਨ ਲੱਗਿਆ ਉਹਨੂੰ ਗੁਰਮਤ ਪ੍ਰਚਾਰ ਕਰਨ ਗੱਲ ਬੱਢ ਪੈਂਦੀ ਉਹ ਕੋ ਬੱਢ ਪੈਂਦੀ ਆ ਨੁਕਸਾਨ ਹੁੰਦਾ ਜੈ ਜੀ ਰੁਖੀ ਪੀਸੀ ਮੈਨੂੰ ਉਹੀ ਖਾਈ ਜਾਂ ਜੇ ਇਹਨੇ ਪਟਣਾ ਤੇਰ ਵੀ ਫੇਰ ਦੋਰ ਮਾ ਦਬਰ ਜਾਲ ਲਾ ਗਿਆ ਜਮ ਕਰਕੇ ਚੱਕੀ ਮੱਲਾਣਾ ਪਈ ਮੇਰੇ ਤੋਂ ਛੱਡ ਕੇ ਤੁਹਾਨੂੰ